ਸੁਖੋ ਵੀ ਅਬਨਾਸ਼ੀ ਪ੍ਰਭ ਮਨ ਲਾ ਕੀ ਤੂੰ ਪ੍ਰੀਤਿ ਤਿਆਗ ਇਹ ਅਬਨਾਸ਼ੀ ਪ੍ਰਭ ਹੈ ਜਿਹੜਾ ਤੇਗੋਂ ਤੇ ਪ੍ਰਭ ਭਿੰਨਾ ਇਹ ਅਬਨਾਸ਼ੀ ਪ੍ਰਭ ਹੈ ਇਹਨਾਂ ਦੇ ਸਾਰੇ ਪ੍ਰਭ ਜੰਮਲ ਬਰਚਦੇ ਜੋ ਕਹੋ ਰਾਮ ਅਜੋ ਨਾ ਜਾਏ ਹੈ ਕਾਹੇ ਕੋ ਕੌਸ਼ਲ ਸੁਖ ਜਿਉ ਜੁ ਯਹ ਕਹਨ ਰਾਮ ਅਜੋ ਨਾ ਹੈ ਆ ਗਾਇਨਾ ਬਿਆ ਉਹਨਾਂ ਨੂੰ ਆਹੀ ਗੱਲ ਕਹਿੰਦੇ ਆ ਰਾਮ ਨੂੰ ਉਹ ਨਾ ਸੀ ਆ ਵੀ ਕਹਿੰਨੇ ਨੇ ਉਹ ਕਹਿੰਨੇ ਜੇ ਕੋ ਰਾਮ ਅਜੋ ਨਾ ਜਾਇਆ ਕਾਏ ਉਹ ਕੌਸ਼ਲ ਕੁਖ ਜयो ਜੂ ਕੌਸ਼ਲਿਆ ਦੀ ਕੁਖ ਚ ਕਿਉਂ ਪੈਗਾ ਹੋਇਆ ਕਹਿੰਦੇ ਹੋ ਫਿਰ ਤੁਸੀਂ ਜੇ ਚਮੇ ਤਾਂ ਮਰੂ ਵੀ ਮਰਿਆ ਵੀ ਜਾ ਦੱਸਦੇ ਹੋ ਤੁਸੀਂ ਉਹ ਰਮਾਇਣ ਚ ਕੁਛ ਲਿਖਦੇ ਹਾਂ ਗੱਲਾਂ ਕੁਛ ਕਰਦੇ ਹਾਂ ਚੱਲਦਾ ਝੂਟ ਚੱਲਦਾ ਜਿੱਨਾ ਚੋੜ ਧਰਮ ਦੇ ਖੇਤਰ ਚੱਲਦਾ ਕਿ ਦੇਵ ਨਹੀਂ ਚੱਲਦਾ ਚੱਲਦਾ ਰਸ ਕਿਉਂ ਕੌਣ ਹੈ ਮੂਰਖੰਦ ਕੋਰ ਨੇ ਜੋ ਜੋ ਪ੍ਰਚਾਰ ਝੂਠੇ ਧਰਮ ਦੇ ਲੀਡਰ ਨੇ ਉਹ ਚੋਰ ਹਰਾਮਖੋਰ ਕੇ ਗੁਰਬਾਣੀ ਜੋ ਧਰਮ ਨੂੰ ਮੰਡਣ ਵਾਲੇ ਨੇ ਜੋ ਧਰਮ ਨੂੰ ਸੱਚ ਬੰਨਣ ਵਾਲੇ ਨੇ ਉਹ ਮੂਰਖੰਦ ਕੋਰ ਨੇ ਚੱਲਦਾ ਹਾਂਜੀ ਅਵਨਾਸ਼ੀ ਪ੍ਰਭ ਮਨਮਹਿਰਾਖ ਅਵਨਾਸ਼ੀ ਪ੍ਰਭ ਹੁੰਦਾ ਜਿਹੜਾ ਜੰਮਣ ਮਰਨ ਦਾ ਪ੍ਰਭ ਨਹੀਂ ਹੁੰਦਾ ਦੇਹ ਤਾੜੀ ਜੰਮਣ ਮਰਨ ਦਾ ਤਿੰਨ ਜਿਹੜਾ ਕਿੰਨਾ ਗੋਲਾਂ ਦੇ ਵਿੱਚ ਅਵਨਾਸ਼ੀ ਇਹ ਜਿਹੜਾ ਇਹੀ ਤਰੇ ਹੁੰਦੇ ਤਿੰਨ ਅਸਲ ਚ ਪ੍ਰਭੂ ਹੋਵਾ ਮਾਨੁਕ ਕੀ ਤੂੰ ਅਵਨਾਸ਼ੀ ਪ੍ਰਭ ਮਨਮਹਿਰਾਖ ਮੰਨ ਦੇ ਵਿੱਚ ਮੰਨ ਕੇ ਕਹਲ ਪ੍ਰਭੂ ਅਵਨਾਸ਼ੀ ਨਾ ਜੰਮਦਾ ਨਾ ਮਰਦਾ ਮਾਨਵਕੀ ਤੂ ਪ੍ਰੀਤਿ ਆਗੋ ਉਹਨਾਂ ਦੇ ਮਨੁਖੂਪਰਾ ਬਣਾਇਆ ਹੋਇਆ ਦੇਵਤਾ ਇਹਨੂੰ ਚਾਹੋ ਕ੍ਰਿਸ਼ਨ ਆ ਚਾਹੋ ਵਿਸ਼ਨੂੰ ਆ ਚਾਹੋ ਰਾਮਚੰਦਰ ਆ ਚਾਹੋ ਸ਼ਿਵਜੀ ਆ ਚਾਹੋ ਦੱਤਾ ਆ ਚਾਹੋ ਜਟਾਤ ਰਹਾ ਚਾਹੋ ਉਪਾਰਸ਼ਨਾਥ ਕੋਈ ਵੀ ਹੈ ਚਾਹੇ ਚਾਹੇ ਉਹਨਾਂ ਚ ਭਗਤਾ ਦੇ ਉਹਨੇ ਸਾਰੇ ਮੁਰਖ ਨੇ ਮਾਨਵਕੀ ਤੂ ਪ੍ਰੀਤ ਮਾਨੁਗਰਾਂ ਪ੍ਰੀਤ ਨਹੀਂ ਪਾਉਣੀ ਐ ਮਾਨੁਗ ਜੋ ਦੱਸ ਗਿਆ ਜੋ ਦੱਸ ਗਿਆ ਗੱਲ ਉਹਦੇ ਨਾਲ ਤਾਂ ਚਾਹੇ ਪ੍ਰੀਤ ਪਾਲੋ ਜੇ ਤੁਹਾਡੇ ਲਭਦਾਇ ਸੈਂ ਉਹਦੇ ਉਪਦੇਸ਼ ਨਾਲ ਤਾਂ ਪ੍ਰੀਤ ਪਾ ਸਕਦੇ ਹੋ ਉਹਦੇ ਨਾਲ ਨਹੀਂ ਪਾਉਣੀ ਉਹਦੇ ਨਾਲ ਪ੍ਰੀਤ ਕਰੀਏ ਉਹਦੇ ਉਪਦੇਸ਼ ਨਾਲ ਪ੍ਰੀਤ ਹੋਣੀ ਚਾਹੀਦੀ ਐ ਮਾਨੁਗ ਕੀ ਕੋਈ ਡਾਕਟਰ ਨੇ ਕੋਈ ਕਿਤਾਬ ਲਿਖੀ ਆਇਆ ਹੋ ਕੋਈ ਖੋਜ ਕੀਤੀ ਹੈ ਉਹਨੂੰ ਖੋਜਣਾ ਪਰੀਦਾ ਸੀ ਸਟੱਡੀ ਕਰਨੀਆ ਡਾਕਟਰ ਕਿੱਥੇ ਪੈ ਗਿਆ ਹੋਇਆ ਸੀ ਉਹਦਾ ਬਾਪ ਕੌਣ ਸੀ ਕੀ ਸੀ ਅਸੀਂ ਕੀ ਲੈਣਾ ਉੱਥੇ ਜੋ ਨੇ ਖੋਜ ਦੱਸਦੀ ਉਹਨੂੰ ਪੜ੍ਹ ਲਓ ਉਹ ਗਿਆਨ ਲੈ ਲਓ ਉਹਦੇ ਗਿਆਨ ਨਾਲ ਪ੍ਰੀਤ ਕਰੀਦੀ ਹੈ ਕਾਲਜਾਂ ਦੇ ਇਹੀ ਕੁਛ ਹੈ ਸਾਇੰਸ ਦਾ ਨਹੀਂ ਸਾਨੂੰ ਹਿੱਸੇ ਤੇ ਲੈਣਾ ਕੁਛ ਜੋ ਨੇ ਖੋਜ ਕੀਤੀ ਉਹ ਵਰਲਣੀ ਸੀ ਸਟੱਡੀ ਉਹਦੀ ਕਰਨੀ ਆ ਸਵਾਇਆ ਦੇ ਖੇਤਰ ਚ ਜੋ ਠੀਕ ਕਰਦੇ ਆ ਕਾਮਯਾਬੀ ਵੀ ਹੈ ਧਰਮ ਦੇ ਖੇਤਰ ਚ ਕੁਝ ਹੋਰ ਉਲਟਾ ਕਰਦੇ ਨੇ ਤਾਂ ਨੀ ਕਾਮਯਾਬੀ ਧਰਮ ਦੇ ਖੇਤਰ ਚ ਕਾਮਯਾਬੀ ਤਾਂ ਨਹੀਂ ਹੈ ਜੋ ਅਸੀਂ ਫੀਲਡ ਸਾਡੀ ਮਾਇਆ ਦੀ ਉਹ ਹੀ ਕਰਦੇ ਆ ਸਟੱਡੀ ਉਦੋਂ ਉਲਟ ਸਟੱਡੀ ਕਰਦੇ ਆ ਅਸੀਂ ਡੋਬਣ ਵਾਲੀ ਸਟੱਡੀ ਕਰਦੇ ਆ ਉਹਦੇ ਅੱਖੇ ਨੂੰ ਜੋ ਨਾਨਕ ਆਖ ਗਿਆ ਨਾਨਕ ਨੂੰ ਮੰਨਦੇ ਆ ਨਾਨਕ ਦਾ ਜਿਹੜਾ ਉਪਦੇਸ਼ ਹੈ ਨਾਨਕ ਦੀ ਗੱਲ ਨਹੀਂ ਮੰਨਦੇ ਨਾਨਕ ਦੀ ਗੱਲ ਕਹੀ ਹੋਈ ਹੈ ਜੋ ਉਹਨੂੰ ਨਹੀਂ ਮੰਨਦੇ ਨਾਨਕ ਨੂੰ ਮੰਨਦੇ ਆ ਨਾਨਕ ਨੂੰ ਕੀ ਮੰਨਦੇ ਹੋ ਕੀ ਮੰਨਦੇ ਮੈਂ ਨਾਨਕ ਜੰਮਿਆ ਸੀ ਜੰਮਿਆ ਸੀ ਇਹ ਤਾਂ ਪਤਾ ਹੀ ਹੈ ਨਾਨਕ ਦਾ ਆਪਸੀ ਸੀ ਨਾਨਕ ਨੇ ਯਾਤਰਾ ਕੀਤੀ ਲੋਕਾਂ ਨੂੰ ਸਮਝਾਇਆ ਸਮਝਾਇਆ ਕੀ ਸਮਝਾਇਆ ਅਰੇ ਤੱਕ ਲੈਣਾ ਕੀ ਸਮਝਾਇਆ ਛੱਡੋ 8000 ਕਿਲੋਮੀਟਰ ਦੀ ਯਾਤਰਾ ਕੀਤੀ ਤੁਸੀਂ ਕੀ ਲੈਣਾ ਯਾਤਰਾ ਤੇ ਤੁਸੀਂ ਦੇਖੋ ਵੀ ਕੀ ਸਮਝਾਇਆ ਕੀ ਉਹ ਲੋਕਾਂ ਨੇ ਮਨੇ ਜਿਹਨੇ ਮਨੇ ਜਿਹਨੇ ਮਨੇ ਉਹ ਲੈਣਾ ਸੀ ਉਹਦਾ ਕੋਈ ਸਬਰ ਗਿਆ ਜਿਹਨਾਂ ਨਹੀਂ ਮੰਨਿਆ ਸ੍ਰੀ ਚੰਦ ਨੇ ਉਹਦਾ ਸਮਰਿਆ ਨਹੀਂ ਕੋਈ ਇਹ ਗੱਲ ਨਹੀਂ ਕਰਦੇ ਇੱਥੇ ਨਹੀਂ ਹੁੰਦੇ ਨਾਲ ਨੂੰ ਮੰਨਦੇ ਜਿਨ੍ਹਾਂ ਨੇ ਨਾਮ ਗਦੀ ਮੰਨੀ ਐ ਉਹ ਲੈਣਾ ਜਿਨ੍ਹਾਂ ਨਹੀਂ ਮੰਨੀ ਉਹ ਹੋਰ ਨਹੀਂ ਇਹ ਨਾਮ ਨਾਲੇ ਚਲੇ ਖੜੇ ਅਜੇ ਨਾਵਨ ਨਾਲ ਆਲੇ ਟਲੇ ਖੜੇ ਨੇ ਉਹ ਗੱਲ ਤੇ ਨਹੀਂ ਆਉਂਦੇ ਲੈਣੇ ਵਾਲੀ ਗੱਲ ਤੇ ਨਹੀਂ ਆਉਂਦੇ ਸ੍ਰੀ ਗੰਦ ਵਾਲੀ ਗੱਲ ਤੇ ਆਉਂਦੇ ਨੇ ਸ੍ਰੀ ਗੰਦ ਅਬਰੂ ਮੂਟਾ ਉਸੇ ਹੈ ਜੱਡਿਆ ਹੋਇਆ ਅਬਰਸਰ ਲੈਣੇ ਦੀ ਕੋਈ ਨਿਸ਼ਾਨੀ ਨਹੀਂ ਅਬਰਸਰ ਚ ਲੈਣੇ ਦੀ ਕੀ ਨਿਸ਼ਾਨੀ ਹੈ ਉਹਦੀ ਕੋਈ ਨਿਸ਼ਾਨੀ ਨਹੀਂ ਸ੍ਰੀ ਗੰਦ ਹੀ ਹੈਗੀ ਹੈ ਲੈਣੇ ਦਾ ਨੋਮਨੀ ਲੰਦੇ ਸਾਹ ਅਦਰਜ ਕੋਈ ਨਹੀਂ ਲੈਂਦਾ ਇਹ ਲੋਕ ਵੀ ਆਉਂਦੇ ਦਾ ਮਾਲਾ ਦੂਜਾ ਹੀ ਆਉਂਦਾ ਲੈਣ ਦਾ ਫਿਰ ਵੀ ਨਾਉ ਨਹੀਂ ਆਉਂਦਾ ਲੈਣ ਲੋਕ ਨਾਉ ਨਹੀਂ ਲਾਗੇ ਰਾਜੀ ਸ੍ਰੀ ਚੰਦ ਵਾਲੇ ਕੇ ਮੇਲੇ ਉਹ ਤਾਂ ਸ੍ਰੀ ਗਿਸ਼ਿਲਣ ਇਹਾਂ ਦੇ ਪੋਤੜੇ ਥੋਲੇ ਜਾਣੇ ਨੇ ਹੁਣ ਫੁੱਲ ਜਾਣੇ ਨੇ ਜੋ ਕੁਝ ਕੀਤਾ ਪੋਤੜੇ ਫੁੱਲੇ ਜਾਣੇ ਨੇ ਆ ਕੁਛ ਹਰਥ ਬ੍ਰੋਧ ਵਾਲੇ ਨੇ ਜਿਹੜੇ ਨਾਲ ਹੁੰਦੇ ਬ੍ਰੋਧ ਆਉਣੇ ਨੇ ਉਹਨਾਂ ਦਾ ਕਿੱਦਾਂ ਡੜਿਆ ਆ ਉੱਥੇ ਚੜ੍ਹਦੇ ਦੋ ਨੇ ਕਿਉਂਕਿ ਦੁਆ ਕੀਦਾ ਦੁਆ ਕੀਦਾ ਇਹ ਜਿਹੜੀ ਚੰਦਾ ਹੋਊਗਾ ਇੱਕ ਇਹਨਾਂ ਦਾ ਹੋਊਗਾ ਮੀਣਿਆਂ ਦਾ ਇੱਕ ਬੇਡੀਆਂ ਦਾ ਇੱਕ ਥੋੜੀਆਂ ਦਾ ਥੋੜੀ ਮੀਣਾਂ ਸੀਗੇ ਦੁਆ ਸੱਚੀ ਚੰਗੀ ਤਾਂ ਦੋ ਚੜ੍ਹਦੇ ਨੇ ਉਹ ਬ੍ਰੰਗੂਟੇ ਵਾਲਾ ਵੀ ਚੱਡਾ ਚਾਹੀਦਾ ਉੱਥੇ ਹੋਏਗਾ ਇਹ ਕੋਈ ਇਹਨੇ ਦੋ ਨਿਸ਼ਾਨ ਨੇ ਔਰ ਇਹਨਾਂ ਦੇ ਕੰਪਰੋਮਾਈਜ਼ ਨਾਲ ਵੇਦੀ ਛੋਡੀਆਂ ਦੇ ਦੋ ਨਿਸ਼ਾਨਾ ਦਾ ਕੀ ਮਤਲਬ ਹੈ ਇੱਥੇ ਜਗਰੂ ਇੱਕ ਜਗਰੂ ਇੱਕ ਪਰਮੇਸ਼ਰੇ ਦਾ ਨਿਸ਼ਾਨ ਧੋਗਾ ਦੇ ਨੇ ਇੱਕ ਵੇਦੀਆਂ ਦੇ ਛੋਡੀਆਂ ਦਾ ਇਹ ਸਾਬਤ ਕਰਨੇ ਕਿੱਥੋਂ ਨੇ ਨਿਸ਼ਾਨ ਕਾਗਾਏ ਕੁਝ ਵੀ ਨਹੀਂ ਇਹਨਾਂ ਕੋਲ ਸਾਬਤ ਕਰਨ ਨੂੰ ਬਾ ਸਾੜੀ ਮਰਿਆਦਾ ਹੈ ਪਰੰਪਰਾ ਹੈ ਹਾਂਜੀ ਅਜ ਕਹਾਂ ਨਹੀਂ ਗਿਆ ਹੁੰਦੇ ਅੰਦਰ ਨਿਕਾਲਾ ਅਨੰਦਪੁਰ ਸਾਹਿਬ ਦਾ ਜਿਹੜਾ ਫਟਿਆ ਇਹ ਅਨੰਦਪੁਰ ਸਾਹਿਬ ਲਈ ਹੈ ਇੱਥੇ ਨਹੀਂ ਕਰਦੇ ਸੀ ਕਿ ਇਹ ਤਾਂ ਖਲਾਫ ਧਲਾ ਸੀ ਹਾਂਜੀ ਸਾਰੇ ਬਨਰ ਸ੍ਰੀ ਇੱਕੋ ਸੋਇ ਇਸ ਤੇ ਪਰ ਜਿਹੜਾ ਮਾਨੁੱਖ ਤੇ ਜਿਹੜਾ ਮਾਨੁੱਖੀ ਪ੍ਰੇਤ ਤਿਆਗ ਇਸ ਤੇ ਪਰ ਕਿਤੇ ਅਵਨਾਸ਼ੀ ਪ੍ਰਪਤਿ ਬਿਨਾ ਕੁਛ ਨਹੀਂ ਹੋ ਸਕਦਾ ਸੰਸਾਰ ਇਸ ਤੇ ਪਰੇ ਪਰੇ ਦਾ ਮਤਲਬ ਉਹ ਤੋਂ ਅਲਾਵਾ ਕੁਛ ਨਹੀਂ ਹੋ ਸਕਦਾ ਸੰਸਾਰ ਚ ਕੁਛ ਨਹੀਂ ਕੋਈ ਕਰ ਸਕਦਾ ਸੰਸਾਰ ਚ ਪਰੇ ਨਹੀਂ ਕੁਛ ਹੋਇ ਸਰਬ ਨਿਰੰਤਰ ਇੱਕੋ ਸੋਇ ਸਰਬ ਨਿਰੰਤਰ ਇੱਕੋ ਸੋਇ ਸਾਰਿਆਂ ਦੇ ਵਿੱਚ ਲਗਾਤਾਰ ਹੈ ਉਹ ਉਹਦੀ ਆਵਾਜ਼ ਫਿਰ ਵੀ ਜਿੰਨੀਆਂ ਵੀ ਜੋ ਆਦਮੀਆਂ ਦੀ ਗੱਲ ਨਹੀਂ ਜਿੰਨੀਆਂ ਜੁਨੀਆਂ ਨੇ ਉਹਨਾਂ ਵਿੱਚ ਸਾਰਿਆਂ ਵਿੱਚ ਹੀ ਹੈ ਉਹ ਸਰਬ ਵਿਆਪੀ ਹੈ ਨਾ ਆਕਾਸ਼ ਬਾਣੀ ਹੈ ਉਹਦੀ ਆਕਾਸ਼ ਜਿੱਥੇ ਤੱਕ ਆਕਾਸ਼ ਹੈ ਉੱਤੇ ਤੱਕ ਉਹ ਹੈ ਬੀਜ ਮੰਤਰ ਸਾਰਿਆਂ ਨੂੰ ਦਿੰਦਾ ਉਹ ਬੀਜ ਮੰਤਰ ਸਰਬ ਗਿਆਨ ਸਾਰੇ ਜੀ ਜੰਤ ਦਾ ਠਾਕੁਰ ਹੈ ਉਹ ਸਾਰੇ ਜੀ ਜੰਤ ਦੀ ਪਾਲਣਾ ਕਰਨੀ ਰੱਖਿਆ ਕਰਨੀ ਜਮਣਾ ਮਾਰਨਾ ਉਹਦੇ ਹੱਥ 'ਚ ਹੈ ਸਾਰਿਆਂ ਨਾਲੇ ਉਹਦਾ ਸੰਪਰਕ ਹੈ ਹੁਣ ਦੂਏ ਦਾ ਸੰਪਰਕ ਸਾਬਤ ਕਰਕੇ ਦਿਖਾਓ ਚਾਹੇ ਰਾਮ ਹੈ ਚਾਹੇ ਕ੍ਰਿਸ਼ਨ ਹੈ ਚਾਹੇ ਕੋਈ ਨਾਨਕਾ ਚਾਹੇ ਕੋਈ ਹੋਰ ਸਾਬਤ ਕਰੋ ਸੰਪਰਕ ਸਾਬਤ ਕਰਕੇ ਦਿਖਾਓ ਹੁਣ ਸਾਬਤ ਕਰੋ ਕਿੱਥੇ ਹੈ ਰਾਮਦਾਸ ਕ੍ਰਿਸ਼ਨ ਦੀ ਤਾਂ ਗੱਲ ਕਰ ਜਾਂਦੇ ਨੇ ਜਾਂ ਨਾਨਕ ਦੀ ਗੱਲ ਆਉਂਦੀ ਹੈ ਨਾ ਕਹਿਣ ਦੀ ਫਿਰ ਫਿਰ ਸੂਰਤ ਨਾਨਕ ਨੂੰ ਨਾ ਤਾਂ ਰਾਵਣ ਨੂੰ ਕਹੋ ਬਿਸ਼ਨੂ ਨੂੰ ਕਹੋ ਇਹਨਾਂ ਦੇ ਨੂੰ ਸ਼ਿਵਜੀ ਨੂੰ ਕਹੋ ਹੋਰ ਦੇਵੀ ਦੇਵਤਾਂ ਨੂੰ ਸਭ ਨੂੰ ਕਹੋ ਨਾਨਕ ਨੂੰ ਕੋਈ ਕਿਉਂਕਿ ਕਹਦੇ ਨਾ ਕਹੀਏ ਉਹ ਵੀ ਆਦਮੀ ਹੈ ਨਾਨਕ ਦਾ ਕਹਿੰਦਾ ਨੀਚ ਅੰਦਰ ਨੀਚ ਜਾ ਤ ਨੀਚ ਹੀ ਨੀਚ नानक ददन के संग साथ बडियां सुगड़ी कह ओ कहंदे जेड़े बडे बडे ने मेरी ओना कोई रीस नहीं मैं क मैं नहीं कुछ कर सकदा ए करते होन के करकदी जान आ ही कह रिया नानक आपे नानक दादा बोल ले रिया और कौन कह ले है सर्वनांतरे एको एक सोई सर्वनांतरे एको एक सोई जो बोलया वणा ने देख के बोले ऐवें झूठ नहीं बोले हर कुछ ਸਰਬ ਨਿਰੰਤਰ ਸਾਰਿਆਂ ਦੇ ਵਿੱਚ ਲਗਾਤਾਰ ਰਹਿੰਦਾ ਧਰੰਤਰ ਲਗਾਤਾਰ ਇਹ ਸੌ ਜਾਂਦਾ ਉਹ ਤੰਬ ਨਹੀਂ ਸੌਂਦਾ ਜੇ ਉਹ ਨਹੀਂ ਸੌਂਦਾ ਤਾਂ ਹੀ ਇਹਦੇ ਅੰਦਰਲਾ ਨਹੀਂ ਸੌਂਦਾ ਤਾਂ ਜਿਹੜਾ ਸਾਲ ਆ ਰਿਹਾ ਨਾ ਜਦੋਂ ਉਹਨੇ ਸਾਨੂੰ ਸਮਝ ਆਉਣਾ ਇਹਨੇ ਵੀ ਸਾਨੂੰ ਸਮਝ ਆਉਣਾ ਨਹੀਂ ਸੌਣਾ ਜੀ ਕਿਹੜੀ ਗੱਲ ਆ ਸਰਣਾ ਕਿਸੇ ਨੇ ਪਾਠੀ ਸੌ ਜਾਂਦਾ ਹੁੰਦਾ ਪਰ ਜੇ ਸੇਵਾਦਾਰ ਜਾਗਦਾ ਹੋਵੇ ਪਾਠੀ ਨੂੰ ਸੌਣ ਨਹੀਂ ਦਿੰਦਾ ਉਹ ਕਿਹੜਾ ਮਾਰਦਾ ਰਹਿੰਦਾ 10 ਮਿੰਟ ਬਾਅਦ ਵੀ ਪਾਠੀ ਜਾਉਂਦਾ ਨਹੀਂ ਗਿਆ ਰੰਗਵਾੜੀ ਦਾ ਸਮਝ ਆਉਂਦਾ ਨੇ ਦੇਵਤਾ ਸੇਵਾਦਾਰ ਤਖੜੇ ਨਾ ਹੋਣ ਸੇਵਾਦਾਰਾ ਤੇ ਬੈਠੇ ਹੀ ਰਹਿੰਦੇ ਪੰਜ ਚਾਰ ਮੋਟਾ ਬਿਜ਼ਨਸ ਬਣ ਗਿਆ ਹੁਣ ਕਾਹਦੇ ਖਣ ਪਾਸ ਨੇ ਪੰਜ ਚਾਰ ਬੰਦੇ ਬੈਠੇ ਰਹਿੰਦੇ ਤੇ ਘਰ ਵਾਲੇ ਵੀ ਸਾਰੀ ਰਾਤ ਕੋਪਲਾ ਪਾਠੀ ਸੌਂਜੇ ਉਪਾਠੀ ਤੰਤਾ ਰਹਿਣਾ ਹੁੰਦਾ ਨੇ ਉਹਵੇਂ ਸੌਂ ਸੁ ਰਹਿੰਦੇ ਨੇ ਬੱਚੇ ਇਸ ਕਰਕੇ ਜੇ ਉਹ ਸੌਂ ਜਵੇ ਤਾਂ ਇਹ ਜਿਹੜਾ ਜੀਵ ਸਤਗੁਰ ਜਿਹੜਾ ਜਾਗਤਾ ਦਿਓ ਇਹ ਵੀ ਸੌਂ ਉਹ ਇਹ ਨਹੀਂ ਸੌਣ ਦਿੰਦਾ ਸਤਗੁਰੂ ਉਹਦੇ ਕਰਕੇ ਜਾਗਦਾ ਆਪ ਜਾਗਦਾ ਸਰਬਨੰਤਰ ਸਾਰਿਆਂ ਦੇ ਅੰਦਰ ਉਹ ਸੁਣੀ ਦਿੰਦਾ ਉਹ ਰੋਂਦਾ ਰਹਿੰਦਾ ਉਹਦੇ ਨਾਲ ਜੁੜਿਆ ਵਾਲਾ ਕਰਕੇ ਹੀ ਸੁਣਦਾ ਜਦੋਂ ਉਹਦੇ ਨਾਲ ਜੁੜ ਜਾਂਦਾ ਨਾ ਫਿਰ ਨਹੀਂ ਸੁਣ ਦਿੰਦਾ ਹੁਕਮਨਾਗੜਾ ਜੁੜ ਜਾਂਦਾ ਉਹ ਨਹੀਂ ਸੁਣਦਾ ਗੁਰਮਖ ਜਾਗੇ ਨਹੀਂ ਰਹੋ ਜੇ ਆਪ ਸੁਣੇ ਤਾਂ ਇਹਨੂੰ ਸੁਣਨ ਦਵੇ ਨਾ ਸੋਵੇ ਨਾ ਸੌਣ ਦਵੇ ਸੱਪ ਦਾ ਡੰਗਿਆ ਜੇ ਸੌਂ ਜੇ ਤਾਂ ਮਰ ਜਾਂਦਾ ਇਹ ਮਾਇਆ ਦਾ ਡੰਗਿਆ ਆ ਸੌਂਦਾ ਹੀ ਮਰਦਾ ਇਹਦਾ ਸੌਣਾ ਹੀ ਮਰਦਾ ਸੱਪ ਦੇ ਡੰਗੇ ਨੂੰ ਸੌਂ ਨਹੀਂ ਦਿੰਦੇ ਹੁੰਦੇ ਜੇ ਕਹਿੰਦੇ ਸੌਂ ਗਿਆ ਨੂੰ ਨਹੀਂ ਫੇਰ ਜਾਗ ਨਹੀਂ ਆਉਣੀ ਅੱਖ ਨਹੀਂ ਖੁੱਲਣੀ ਇਹਦੀ ਬੱਸ ਫਿਰ ਗਿਆ ਇਹਨੂੰ ਸੌਣ ਨਾ ਦੋ ਜਿੰਨਾ ਚਿਰ ਮਾਇਆ ਚ ਜੇ ਸੌਂ ਗਿਆ ਤਾਂ ਮਰ ਗਿਆ ਗੁਰੂ ਮੁੱਖ ਜਗਾ ਨੀਂਦ ਨਾ ਸੋਵੇ ਨੀਂਦ ਨੀ ਸੌਂਦਾ ਉਹ ਆਪ ਜਾਗਦਾ ਸਰਬਨਿਰੰਤਰ ਕੋ ਸੋਏ ਹਾਂਜੀ ਆਪੇ ਬੀਨਾ ਆਪੇ ਆਪੇ ਬੀਨਾ ਆਪੇ ਦਾਨਾ ਜਿੰਨਾ ਜੜੋ ਇਕਾ ਉਹਨਾ ਜਤਨਾ ਬੀਨਾ ਨਾ ਦਾਨਾ ਇੱਥੇ ਜਿਹੜਾ ਹੈ ਇੱਕ ਉਹ ਬੀਨਾ ਦਾਨਾ ਨਾਂ ਪਈ ਹੈ ਗਾਣਾ ਝੋਗਾ ਦੇਣ ਵਾਲਾ ਵੀਨਾ ਝੋਗਾ ਖਾਣ ਵਾਲਾ ਆਪਣਾ ਹੀ ਹੱਥ ਆਪਣੇ ਮੂੰਹ ਨੂੰ ਜਾਂਦਾ ਆਪਣਾ ਹੱਥ ਆਪਣੇ ਮੂੰਹ ਨੂੰ ਜਾਂਦਾ ਆਪੇ ਖਾਂਦਾ ਲਓ ਜੇ ਖਾਂਦਾ ਮੂੰਹ ਤਾਂ ਮੂੰਹ ਜਿਗੜਾ ਖਾਤੇ ਇਸ ਤਰ੍ਹਾਂ ਰਹੇਗਾ ਦੀ ਜੇ ਹੱਥੇ ਚ ਫੜੀ ਆ ਹੱਥੇ ਚ ਘੜਾ ਰਹਿ ਜਾਣੀ ਆ ਮੂੰਹ ਚ ਪਾ ਲਈ ਮੂੰਹ ਚ ਬਣੀ ਜਾਣੀ ਦੰਦਾਂ ਨੇ ਜਿੱਥੇ ਉਥੇ ਬਣੀ ਜਾਣੀ ਯਾਨੀ ਕਿਥੇ ਚ ਖਾਣੀ ਮਿਹਦੇ ਚ ਬਣੀ ਜਾ ਕੇ ਉਥੇ ਹਜਮ ਹੋ ਜਾਣੀ ਆ ਉਸੇ ਰਸਗਰਾਂ ਟੁੱਟ ਜਾਣ ਕੁੱਲ ਮਿਲਾ ਕੇ ਹੱਥ ਨੂੰ ਤਾਕਤ ਜਿਵਾੜੇ ਨੂੰ ਤਾਕਤ ਜੀਭ ਨੂੰ ਤਾਕਤ ਸਾਰੀ ਤਾਕਤ ਉਸ ਖਰਾਬ ਚ ਹੋਣੀ ਆ ਹਿੱਸਾ ਸਾਰੇ ਨੂੰ ਮਿਲ ਜਾਵੇ ਮਹਿੰਦ ਦਾ ਜਿੱਥੇ ਚਲਣੀਆਂ ਚੀਜ਼ ਹੈ ਉੱਥੋਂ ਜਾ ਕੇ ਸਾਰਾ ਸਰੀਰ ਨੂੰ ਮਿਲਣਾ ਹੈ ਬਣਵਾਇਆ ਸਭ ਨੂੰ ਮਿਲ ਜਾਣਾ ਜਿਹਨੇ ਜਿਹਨਾਂ ਜਿਹਨਾਂ ਕੰਮ ਕੀਤਾ ਰਹਿਣੀ ਕਿਸੇ ਕੋਲ ਨਹੀਂ ਜਾਣੀ ਵੀ ਕਿਸੇ ਕੋਲੋਂ ਨਹੀਂ ਨਾ ਕਿਸੇ ਕੋਲ ਰਹਿਣੀ ਆ ਨਾ ਕਿਸੇ ਕੋਲੋਂ ਜਾਣੀ ਹੈ ਹੱਥ ਚ ਹੱਥ ਚ ਨਹੀਂ ਰਹੀ ਮੂੰਹ ਵਾਲੀ ਮੂੰਹ ਚ ਨਹੀਂ ਰਹੀ ਪੇਟ ਵਾਲੀ ਪੇਟ ਚ ਨਹੀਂ ਰਹੀ ਔਰ ਰਹੀ ਬੁਦੀ ਸ਼ਕਤੀ ਬਣਵੀ ਸਾਰੀ ਮਿਲ ਗਈ ਸਰੀਰ ਚ ਅੱਖਾਂ ਨੂੰ ਵੀ ਮਿਲ ਗਈ ਅਕਮਿਤਾ ਹੈ ਕੀ ਆ ਮਕਦਾ ਜੈ ਸ਼ਕਤੀ ਨਿਰੰਦ ਦੀ ਅੱਖ ਵੀ ਨਹੀਂ ਚੰਕਉਂਦੀ ਬੁਲਵਨੀ ਹਲਦਾ ਜੇਬ ਬੁਲਦੀ ਬੁਲਵਨੀ ਹੁੰਦਾ ਆਪੇ বিনা ਆਪੇ ਦਾ ਆਪੇ ਦਾ ਹੱfte ida naye apay beena danna gawa innu sa lenda beena gawa inda hath paisa launda hath paer hlaunda kam kardda paisa nardda e beena khaan wala khauwa taahi chaluga je hun je khauwa koi machine di taahi chalugi khaye te chalni o vaya di kharaase nu khaani pendei chaln vaaste hath paer hlaun vaaste ਆਪੇ ਬੀਨਾ ਆਪੇ ਦਾਨਾ ਜ਼ਹਿਰ ਗੰਭੀਰ ਗਹਿੀਰ ਸਜਾਨੋ ਜਹਿਰ ਗੰਭੀਰ ਗਹਿੀਰ ਸਜਾਨੋ ਜਿਹੜਾ ਦਾਨਾ ਬਿਨਾ ਇਕੋਈ ਵਸ ਦੋ ਨਹੀਂ ਹੁੰਦਾ ਪ੍ਰਕਾਰ ਗਭੀਰ ਇਕ ਕਹੂ ਕਿ ਹੈ ਸੰਬੋਧਨ ਕਰੂ ਨਾ ਬਿਨਾ ਦਾਨਾ ਇੱਥੇ ਆਹੋ ਹੋਣ ਦਾਨਾ ਬਿਨਾ ਉਹੀ ਇਕੋਈ ਆ ਕੋਈ ਦਾ ਦਾਨਾ ਬਿਨਾ ਦਿੰਦਾ ਉਹੀ ਹਾਸਲ ਚੋ ਉਹਦੀ ਕੋਈ ਕਮਜ਼ੋਰੀ ਪਈ ਹੋਈ ਆ ਉਹਦੇ ਵਿੱਚ ਵਿਵਾਰ ਹੋਇਆ ਹੋਇਆ ਕਰਕੇ ਦੋ ਕਰਨੇ ਪਏ ਇਥੇ ਬੀਨਾ ਦਾ ਨਾ ਤਾਂ ਬਲਾਉਣਾ ਪਿਆ ਉਹ ਕਮਜ਼ੋਰੀ ਕਰਕੇ ਹੀ ਜੋ ਕਮਜ਼ੋਰੀ ਪਈ ਆ ਗਿਆਨ ਦੀ ਘਾਟ ਪਈ ਆ ਉਹ ਦਾਨ ਉਹ ਬੀਨਾ ਤਾਂ ਹੈ ਉਹ ਕਮਜ਼ੋਰੀ ਦੀ ਗੱਲ ਆ ਦੁਨੀਆਵੀ ਖਰਾਕ ਦੀ ਗੱਲ ਨਹੀਂ ਹੈ ਦੁਨੀਆਵੀ ਖਰਾਕ ਦੀ ਗੱਲ ਨਹੀਂ ਹੈ ਜੋ ਗਿਆਨ ਦੀ ਕਮਜ਼ੋਰੀ ਆ ਜਿੱਤ ਸਤਗੁਰ ਤੋਂ ਹੁਕਮਜੋਰੀ ਪੂਰੀ ਹੋਣੀ ਤੇ ਨਾਮ ਸਤਗੁਰ ਤੇ ਪਾਇਆ ਜਾਣਾ ਨਾਮ ਸਤਗੁਰ ਤੋਂ ਪਾਇਆ ਜਾਣਾ ਤੇ ਉਹਦੀ ਤਾਕਤਮਾਨ ਬੁੱਧੀ ਨੂੰ ਮਿਲਣੀ ਹੈ ਤਾਕਤਮਾਨ ਬੁੱਧੀ ਨੂੰ ਮਿਲਣੀ ਹੈ ਤਾਂ ਜਿਵੇਂ ਸਰੀਰ ਦੀ ਖਰਾਕ ਦੀ ਤਾਕਤ ਮਿਲਦੀ ਹੈ ਸਾਰੇ ਸਰੀਰ ਨੂੰ ਵੇਲੇ ਤਾਕਤਮਾਨ ਬੁੱਧੀ ਬੋਲ ਦੀ ਤਾਕਤ ਜਿਹੜੀ ਹੁੰਦੀ ਹੈ ਸਾਰੇ ਸਰੀਰ 'ਤੇ ਜਾਂਦੀ ਹੁੰਦੀ ਹੈ ਇੱਕੋ ਸਰੀਰ ਹੈ ਕਿਡਾ ਹੱਡ ਨੇ ਆਪੇ ਬਿਨਾਂ ਆਪੇ ਦਨ ਗਹਿਰ ਦਮੀਰ ਗਹਿਰ ਦਮੀਰ ਇੱਕ ਗੰਭੀਰ ਹੁੰਦਾ ਗਹਿਰ ਗੰਭੀਰ ਹੁੰਦਾ ਜਿਹੜੀ ਰੀ ਗਿਆ ਜੋ ਕਬਰ ਨਹੀਂ ਕਦੇ ਜੋ ਡੋਲਦਾ ਨਹੀਂ ਕਦੇ ਜੋ ਚਿੰਤਾ ਨਹੀਂ ਕਰਦਾ ਕਦੇ ਕਿਸੇ ਚੀਜ਼ ਦੀ ਜਿਹਨੂੰ ਚਿੰਤਾ ਹੈ ਹੀ ਨਹੀਂ ਉਹ ਗੰਭੀਰ ਹੈ ਜਿਹੜਾ ਕਾਲਾ ਨਹੀਂ ਪੈਂਦਾ ਜਿਹਨੂੰ ਕਾਹ ਨਹੀਂ ਹੁੰਦਾ ਕਾਰ ਮੇਰ ਗਹਿਰ ਸੁਜਾਨਾ ਸੁਜਾਨਾ ਗਹਿਰ ਬਹੁਤ ਗਹਿਰੀ ਸੋਚ ਹੈ ਉਹਦੀ ਗਹਿਰਾਈ ਦਾ ਘਰੇਲ ਨੂੰ ਸਮਝ ਲੈਂਦਾ ਸੁਜਾਨਾ ساری ਜਾਣਕਾਰੀ ਇਹ ਸ੍ਰਿਸ਼ਟੀ ਕਿਵੇਂ ਪੈਦਾ ਹੋਈਆ ਕੀ ਹੋ ਰਿਹਾ ਉਹ ਕੌਣਾ ਇੱਕ ਗੱਲ ਪ੍ਰਭ ਦੀ ਚੱਲ ਰਹੀ ਹੈ ਤੇ ਗੁਰੂ ਤੇ ਪ੍ਰਭ ਤੇ ਬਦੀ ਗੱਲ ਚੱਲ ਰਹੀ ਹੈ ਜਿਹੜਾ ਤੇ ਤੇ ਪ੍ਰਭ ਹੈ ਉਹ ਗਹਿਰ ਗੰਭੀਰ ਕਹੀਰ ਸਜਾਨਾ ਇਹਦਾ ਜੋ ਗਹਿਰ ਗੰਭੀਰ ਕਹੀਰ ਸਜਾਨਾ ਕੋਈ ਵੀ ਨਹੀਂ ਨਾ ਰਾਮਚੰਦਰ ਹੈ ਨਾ ਕ੍ਰਿਸ਼ਨ ਹੈ ਨਾ ਵਿਸ਼ਨੂ ਹੈ ਨਾ ਬ੍ਰਹਮਾ ਨਾ ਸ਼ਿਵ ਹੈ ਕੋਈ ਵੀ ਇਹ ਗਹਿਰ ਗੰਭੀਰ ਨਹੀਂ ਸਜਾਨਾ ਇਹਨਾਂ ਦੇ ਗ੍ਰੰਥ ਪੜ੍ਹ ਕੇ ਦੇਖ ਲਓ ਇਹ ਸ਼ਰਤ ਤੇ ਕੋਈ ਵੀ ਫੜਾ ਨਹੀਂ ਉਤਰਦਾ गहिर गहिर ਗਹੀਰ ਸਜਾਨਾ शर्त पे कोई भी खरा नहीं उतरता हां पारब्रह्म परमेश्वर गोविंद कृपा का आनंद दयाला ज्यादा सब तो ज्यादा कृष्ण नु ए बंदे ने उने गीता दी है विष्णु ने कोई ग्रंथ नहीं लिखया शिवजी ने कोई ग्रंथ नहीं लिखया रामचंद्र ने कोई ग्रंथ नहीं लिखया लोका ने उना ਕ੍ਰਿਸ਼ਨ ਨੇ ਗੀਤਾ ਤਾਂ ਲਿਖੀ ਕਹਿੰਦੇ ਨੇ ਚਲੋ ਮੰਨ ਲਾ ਨੇ ਲਿਖੀ ਹੈ ਰਿਸ਼ਮੂਨੀਆ ਤੋਂ ਉੱਪਰ ਦੀ ਗੱਲ ਲਿਖੀ ਆ ਉਹਨੇ ਇਹ ਗੀਤਾ ਨੂੰ ਸਭ ਤੋਂ ਉੱਚੀ ਮੰਨਦੇ ਨੇ ਠੀਕ ਹੈ ਪਰ ਜਦੋਂ ਕ੍ਰਿਸ਼ਨ ਜਾਂਦਾ ਹੈ ਜਾਂ ਤਾਂ ਸੱਚਖੰਡ ਉਹਨੂੰ ਕਿਸੇ ਮਸਲੇ 'ਚ ਜਿਵੇਂ ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ ਤਾ ਉਹਨੂੰ ਪੁੱਛਿਆ ਕਹਿੰਦਾ ਕੌਣ ਬਾਹਰ ਜਿਵੇਂ ਦਰਵਾਜੇ ਤੇ ਕਹਿੰਦਾ ਕ੍ਰਿਸ਼ਨ ਕਹਿੰਦਾ ਕੌਣ ਕ੍ਰਿਸ਼ਨ ਕੌਣ ਕ੍ਰਿਸ਼ਨ ਤੂੰ ਕਿਹੜਾ ਕ੍ਰਿਸ਼ਨ ਆ ਤੂੰ ਇਤਨੀ ਪਤਾ ਤੇ ਤੇਰੇ ਵਰਗੇ ਕਰੋੜਾਂ ਇੰਕ੍ਰਿਸ਼ਨ ਨੇ ਕੌਣ ਕ੍ਰਿਸ਼ਨ ਉਹ ਕਹਿੰਦਾ ਬ੍ਰਿਤ ਲੋਕ ਭਾਰਤ ਖੰਡ ਯਦਵਾਂਸ਼ ਕ੍ਰਿਸ਼ਨ ਕਹਿੰਦੇ ਭਰਾ ਐਂ ਬੋਲ ਅਡਰਸ ਹੈ ਪਿਆ ਕ੍ਰਿਸ਼ਨ ਨੂੰ ਇਹਨਾਂ ਦਾ ਲਿਖਿਆ ਹੋਇਆ ਕਦਰ ਬਾਗਲ ਲਿਖਦਾ ਕਿ ਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਉਹ ਸੱਚ ਖੜਦੀ ਇਹਨਾਂ ਦੀ ਆਪਣੀ ਬੰਨੀ ਹੋਈ ਗੱਲ ਹੈ ਇਹਨਾਂ ਦੀ ਆਪਣੀ ਬੰਨੀ ਗੱਲ ਹੈ ਬੋਲਣ ਕਿਵੇਂ ਨਹੀਂ ਕਹਿੰਦਾ ਦੱਸੋ ਤੁਹਾਡੇ ਕੋਲ ਕੀ ਸਬੂਤ ਹੈ ਕੋਈ ਨਹੀਂ ਸਬੂਤ ਅਸਲ ਨਹੀਂ ਹੈ ਤਰ ਤੂੰ ਬੋਲ ਕੋਲ ਸਬੂਤ ਹੈ ਜੱਗਾਂ ਨੇ ਭਾਰਤਖੰਡ ਬ੍ਰਿਤ ਲੋਗ ਅੰਮ੍ਰਿਤ ਲੋਗ ਭਾਰਤਖੰਡ ਇਆਦਬ ਕਰਨ ਸੀ ਕ੍ਰਿਸ਼ਨ ਉਹ ਕਹਿੰਦੇ ਭਾਈ ਹਾਂ ਬੋਲੋ 1800 ਤਕਰੀਬਤ ਅੱਜ ਬਸੇ ਰਿਹਾ ਕ੍ਰਿਸ਼ਨ ਸਾਡੇ ਕੋਲ ਸਤਨ RAM ਕਹਿੰਨੇ ਕਹਿੰਦਾ ਗਲੀ ਗਲੀ RAM ਚਾਰ ਚਾਰ ਰਾਹ ਹੋਣੇ ਗਲੀ ਚ ਕਿਹੜਾ RAM ਕੀ ਪਤਾ RAM ਕੌਣ ਤੂੰ ਬਾਬੇ ਦਾਦਾ ਦਾ ਨਾਮ ਦੱਸ ਫਿਰ ਪਤਾ ਲੱਗੂ ਕੋਮਾ ਹਲਾ ਦਾ ਮਕਾਨ ਨੰਬਰ 10 ਫਿਰ ਪਤਾ ਲੱਗੂ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਭਾਉਣ ਦਇਆਲ ਬਖਸ਼ਣ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਪਾਰ ਬ੍ਰਹਮ ਜਿਹੜਾ ਪਰਮ ਈਸ਼ਵਰ ਹੈ ਇੱਕ ਈਸ਼ਰ ਹੁੰਦਾ ਹੈ ਕਿ ਪਰਮੇਸ਼ਰ ਹੁੰਦਾ ਹੈ ਪਰਮੇਸ਼ਰ ਉਹ ਪਾਰ ਬ੍ਰਹਮ ਕਹ ਲੋ ਪਰਮੇਸ਼ਰ ਕਹ ਲੋ ਗੋਬਿੰਦ ਕਹ ਲੋ ਸਾਡਾ ਉਹ ਗੋਬਿੰਦ ਵੀ ਹੋਈ ਹੈ ਇਹਨਾਂ ਦਾ ਉਹ ਵਿਦਿਪ੍ਰੇਸ਼ਨ ਹੋਊਗਾ ਪਰਮੇਸ਼ਰ ਨਹੀਂ ਕਹਿੰਦੇ ਕ੍ਰਿਸ਼ਨ ਨੂੰ ਇਹ ਕ੍ਰਿਸ਼ਨ ਨੂੰ ਪਰਮੇਸ਼ਰ ਨਹੀਂ ਕਹਿੰਦੇ ਪਾਰਬ੍ਰਮ ਨਹੀਂ ਕਹਿੰਦੇ ਕ੍ਰਿਸ਼ਨ ਨੂੰ ਇਹ ਦੋ ਇਹਨਾਂ ਦੇ ਦੋ ਜਿਹੜੇ ਲੱਖ ਨੇ ਲੱਖ ਵਿੱਚ ਰੱਖਿਆ ਹੋਇਆ ਨੇ ਇਹ ਨਹੀਂ ਕਹਿੰਦੇ ਗ੍ਰੰਥਾਂ ਦੇ ਵਿੱਚ ਇਹਦੀ ਵਿਆਖਿਆ ਹੋ ਰਹਾ ਫਿਰ ਉਹ ਬੰਦੀ ਦੀ ਸੀ ਜਿੱਦਿ ਕਿ ਸ਼ਾਰਦਨ ਤੇ ਉਹ ਦਿੱਤੀ ਉਨੀ ਕਰਦੀ ਈਸ਼ਵਰ ਕਹਿੰਦੇ ਹਾਂ ਈਸ਼ਵਰ ਕਹਿੰਦੇ ਉਹ ਗਾਵਣ ਤੋਂ ਨੂੰ ਈਸ਼ਰਪਰਮਾ ਦੇਵੀ ਈਸਰ ਤਾਂ ਸਾਰੇ ਹੀ ਨੇ ਕਹਿੰਦੇ ਨੇ ਵਿਸ਼ਨੂੰ ਨੂੰ ਕੋਈ ਸ਼ਿਵ ਨੂੰ ਕਹਿੰਦਾ ਬਰਮਾ ਵਿਸ਼ਨੂੰ ਸੜੇ ਤਾਂ ਆਗਣਤ ਉਹ ਤਾਂ ਨੇ ਫਿਰ ਸਾਰੇ ਤਨ ਕੋ ਮੋ ਦਿਆ ਵਨ ਵਲਕਾ ਹਾਂਜੀ ਕਿਰਪਾ ਨਿਧਾਨ ਬਿਆਲ ਬਖਸ਼ੰਦ ਕਿਰਪਾ ਨਿਧਾਨ ਬਿਆਲ ਬਖਸ਼ੰਦ ਜੇ ਕਿਰਪਾ ਨਿਧਾਨ ਹੋ ਜਾਏ ਜੀ ਜੇ ਕਿਰਪਾ ਕਿਰਪਾ ਕਰੇ ਸਾਰਿਆਂ ਤੇ ਕਿਰਪਾ ਕਰਵਾਲਾ ਹੈ ਜੀ ਜਿਹੜਾ ਕਿਰਪਾ ਕਰਨ ਵਾਲਾ ਹੈ ਹੈ ਜੋ ਸਾਰਿਆਂ ਤੇ ਕਿਰਪਾਲੂ ਹੈ ਇਸ ਨਾਲ ਬੈਰ ਵਿਰੋਧ ਨਹੀਂ ਕਰਦਾ ਬਿਆਲ ਹੈ ਦਿਆਈ ਕਰਦਾ ਬਖਸ਼ੰਦ ਬਖਸ਼ਾ ਬਖਸ਼ਦਾ ਇਹੋ ਕਿਸ ਨੂੰ ਸਜ਼ਾ ਨਹੀਂ ਦਿੰਦਾ ਉਹ ਗੁਫਤਾਂ ਗੁਫਤਾਂ ਦਿੰਦਾ ਉਹ ਸਾਨੂੰ ਕੰਮ ਸਾਡੇ ਕਾਜ ਸਵਾਰਦਾਈਆ ਬਗਾਰਦਾਈ ਨਹੀਂ ਕੋਈ ਹੈ ਬਖਸ਼ਦਾ ਜਿਹੜੀ ਚੀਜ਼ ਜਿਵੇਂ ਮਰੀਜ਼ ਨੂੰ ਚਾਹੀਦੀ ਹੈ ਉਹ ਮਰੀਜ਼ ਨੂੰ ਉਹਦੇ ਜਿਹੜੀ ਕੋਈ ਵੀ ਚੀਜ਼ ਮੁੱਲ ਨਹੀਂ ਮਿਲਦੀ ਮਰੀਜ਼ ਨੂੰ ਸਾਰੀਆਂ ਇਥੇ ਫਰੀ ਨੇ ਕਿਰਪਾ ਨੇ ਦਿਆਲ ਬਖਸ਼ਾਂ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਦੇ ਬਲ ਇਹ ਅਨਰਾਉ ਸਾਧ ਤੇਰੇ ਕੀ ਚਰਨੀ ਪਾਉ ਮੈਂ ਤੇਰਾ ਜਿਹੜਾ ਸਾਧ ਆ ਨਾ ਤੇਰਾ ਸਾਧ ਆ ਜਿਹੜਾ ਤੇਰੀ ਸਾਧਨਾ ਕਰ ਲਈ ਜਿਹਦੇ ਤੇਰੇ ਵਰਗਾ ਹੋ ਗਿਆ ਜਿਹੜੇ ਸਾਧ ਤੇਰਾ ਹੁੰਦਾ ਜਿਹੜੇ ਤੇਰੇ ਵਰਗਾ ਜਿਹਦਾ ਮਨ ਤੇਰੇ ਵਰਗਾ ਹੋ ਗਿਆ ਸਾਧ ਕੇ ਤੇਰੇ ਕੀ ਚਲ ਨਹੀਂ ਪਾਉ ਉਹਦੇ ਚਲ ਨਹੀਂ ਪਾਉ ਦਾ ਮਤਲਬ ਹੈ ਉਹਦੇ ਪਿੱਛੇ ਲੱਗ ਉਹਦਾ ਅਨੁਸਾਰਨ ਕਰਾਂ ਸਾ ਤੇਰੇ ਕੀ ਚਲ ਨਹੀਂ ਪਾਉ ਨਾਨਕ ਕਹਿ ਮੰਨ ਇਹੋ ਅਨਰੋਧ ਨਾਨਕ ਦੇ ਮਨ ਦੇ ਵਿੱਚ ਇੱਛਾ ਇੱਛਾ ਇਹ ਹੈ ਅਨਰੋਧ ਇਹ ਹੈ ਇੱਛਾ ਇਹ ਹੈ ਇਹ ਮਨ ਦੇ ਵਿੱਚ ਇੱਕ ਬਹਾਵ ਹੈ ਮੇਰਾ ਬਹਾਵ ਹੈ ਵੇ ਰੇ ਇੱਛਾ ਜਿੱਦ ਨੂੰ ਮੇਰਾ ਮਨ ਦੀ ਇੱਛਾ ਜਿਵੇਂ ਪਹਾੜ ਤੋਂ ਪਾਣੀ ਜਾਂਦਾ ਹੈ ਤੇ ਜਗਾ ਬਰੂਦ ਜਾਂ ਇਹ ਇੱਛਾ ਮੇਰੀ ਕਿ ਇੱਧਰ ਨੂੰ ਮੈਂ ਜਾਣਾ ਸਾਹ ਜਦ ਜਿੱਦ ਨੂੰ ਜਾ ਰਿਹਾ ਇਹ ਰਸਤੇ ਜਾਣਾ ਨਾਨਕ ਜੀ ਮਾਰ ਇਸ਼ਾਰਾ